शलोक मोहल्ला चौथा जिना अंदर उम्रथल तेई जाने सुलिया ओ जड़ा मतलब है जड़ी पलट गया लो बिल्कुल हां जी पाया तो ठीक है जी ओ है, भाया, आ, भाया ने कि ये पाया जड़ी है सूड़ियों ਠੀਕ ਹੈ ਹਾਂ ਉਹ ਜਾਂਦੇ ਨੇ ਵੀ ਇਹ ਜਿਹੜੀ ਦੇ ਸੂਰੀਓ ਹਾਂ ਹਾਂ ਠੀਕ ਹੈ ਜੀ ਹਰ ਜਾਣੈ ਸਈ ਬਿਰਹੋਂ ਹਾਂ ਹੌ ਤਿੰਨ ਵਿੱਚੋਂ ਸਦ ਘੁਮ ਘੋਲੀਆ ਮੇਰਾ ਇਹ ਹਰ ਦਾ ਵਿਛੋੜਾ ਜਾਣ ਲਿਆ ਵਿਗਤੋ ਵਿਛਲੇ ਹੋਏ ਦੇ ਭਲਾਏ ਹੋਏ ਉਹ ਵਿਛੋੜੇ ਵਿਆ ਸੋਣੀਆਂ ਉਹਨਾਂ ਨੂੰ ਜੁਬਦੀਆਂ ਨੇ ਦੂਜੇ ਨੂੰ ਵੀ ਜੁਬੜੀ ਹੁੰਦੀ ਜਿਹਨੂੰ ਪਤਾ ਹੀ ਨਹੀਂ ਵਿਛੋੜੇ ਦਾ ਠੀਕ ਹੈ ਜੀ ਜਿਹਨੂੰ ਕਹਿੰਦੇ ਅਹਿਸਾਸ ਹੋ ਗਿਆ ਵਿਛੋੜੇ ਦਾ ਉਹਨਾਂ ਤੋਂ ਗੁਰਬਾਨ ਜਾਂਦੇ ਲਈ ਤਾਂ ਆ ਐਸਾ ਕੋਈ ਸੱਜਣ ਪੁਰਖ ਟੋੜੋ ਉਹਨਾਂ ਦੇ ਉੱਤੋਂ ਆਪਣਾ ਪਕੜਵਾਣ ਕਰਦੇ ਐਸਾ ਸੱਜਣ ਪੁਰਖ ਜੇ ਕੋਈ ਮਿਲ ਜਵੇ ਤਾਂ ਟੋੜ ਲਓ ਜੇ ਸਤਿ ਸੱਚ ਹੋਵੇ ਲੱਗ ਲਓ ਇਹ ਜਿਹੜੇ ਫਿਰਦੇ ਨੇ ਸਤਿ ਬੁਗੈਰਾ ਹਾਂਜੀ ਇਹ ਪਰੰਪਰਾ ਤਾਂ ਪੜ ਲਈਏ ਟੋਲਣ ਵਾਲਿਆਂ ਦੀ ਪਰੰਪਰਾ ਪਾਈ ਹੋਈ ਆ ਹੁਣ ਤਾਂ ਜਾਂਦੇ ਨੇ ਕਬਲੇ ਬੰਗੂ ਅਸਲ ਵਿੱਚ ਟੋਲਣ ਵਾਲੇ ਫਿਰਦੇ ਹੁੰਦੇ ਸੀ। ਕਿੱਥੇ ਟੋੜਦੇ ਨੂੰ ਫਿਰਦਾ ਹੁੰਦਾ ਹੈ? ਹਾਂਜੀ। ਆਹ ਦੇਖੋ ਲੰਬੂ ਕਾਪਟਰ ਕਬੀਰ ਨੂੰ ਵੀ ਚਲੋ ਘਰ ਬੈਠੇ ਨੂੰ ਆ ਕੇ ਦੱਸ ਦਿੰਦੇ ਸੀ ਪਤਾ ਲੱਗਿਆ ਫਿਰ ਵੀ ਜਾਨੋ ਦਾ ਪਿਆ ਗੁਰੂ ਅਰਜਨ ਦੇਵ ਜਲਦੇ ਸੀ ਹੁੰਦਾ ਤੇ ਵੀ ਕੋਈ ਗੁਰੂ ਅਰਜਨ ਠੀਕ ਹੈ। ਵੇ ਆਪਣਾ ਗੁਰਮੁਖ ਸਾਹਿਬ ਦੇ ਸੰਗਤ ਦੇ ਵਿੱਚ ਪੂਰੀ ਕਰਤੀ ਛਲੂ ਦੀ ਪੂਰੀ ਹੋ ਗਈ ਜਿਹਦੇ ਅੰਦਰ ਇੱਛਾ ਹੋਵੇ ਹਾਂ ਮੈਂ ਉਹਦਾ ਗੋਲਾ ਦਾ ਗੋਲਾ ਉਹਦਾ ਬਣ ਕੇ ਬਹੁਤ ਬੜੀ ਖੁਸ਼ੀ ਹੋਵੇ। ਪਰ ਉਹਦਾ ਗੋਲਾ ਬਣ ਕੇ ਜੇ ਦਾ ਤੌਰ ਕੀ ਚਾਹੀਦਾ? ਹੂੰ ਹੂੰ। ਠੀਕ ਹੈ ਉਹਦੀ ਹਰ ਰੰਗੀ ਚਲੂਲੇ ਜੋਰ ਅੱਤੇ ਤਿੰਨ ਭਿੰਨੀ ਹਰ ਰੰਗ ਚੋਲੀ ਆ। ਰੰਗ ਨਾਲ ਦੂਣਾ ਰੱਬ ਚੜਿਆ ਹੋਵੇ ਚਲੂਲਾ ਇਹਦਾ ਹਾਂ ਹਾਂ 42 ਹੋਵੇ ਹੂੰ ਜਿਹੜੇ ਆਰੰਭੋਂ ਤੋਂ ਢੰਡੋਂ ਪੈਦਾ ਹੋਵੇ ਜਿੱਦੂ ਤੱਕ ਇਹਦੇ ਇਹ ਤਾਂ ਗਾਲਾਂ ਹੋਵੇ ਅੱਛਾ ਜੀ ਹਾਂ ਗਿਆਨ ਇੰਨਾ ਹੋਵੇ ਉਹਦੇ ਕੋਠਾ ਹੂੰ ਦਾ ਲੱਗ ਇੰਨਾ ਹੋਵੇ ਸੁਣ ਵਾਲੇ ਤੋਂ ਖਾਬਿਆ ਜਾਵੇ ਠੀਕ ਹੈ ਜੀ ਜੇ ਸੁਣਨ ਵਾਲਾ ਉਹ ਪੂਰਾ ਸਮਝ ਸਕੇ ਉਹ ਦੋ ਤਿੰਨ ਗਾਣਵਾਰ ਚ ਪੂਰਾ ਸਮਝ ਸਕੇ ਇਦੋਂ ਪਿੰਨੇ ਆਦਾ ਮਚੋਲੀਆ ਉਹਨਾਂ ਦੀ ਭਿੱਜਗੀ ਚੋੜੀ ਬੁੱਧ ਦਾ ਹਿਰਦਾ ਭਿੱਜ ਗਿਆ ਰੱਬ ਨਾਲ ਠੀਕ ਹੈ ਜੀ ਜਿਹੜਾ ਲੋਕ ਜਿਹੜਾ ਉਹਦਾ ਜਿਹੜਾ ਹਿਰਦਾ ਕਰੀ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵੇਚਿਆ ਮੋਲੀਆ ਗੁਰਦੇਵ ਗੁਲਾਤਾ ਠੀਕ ਐਸੀ ਕੀਤੀ ਕਿ ਤਮਗ ਦੀ ਇੱਕ ਮੋਲੀਆ ਫਾਸਦ ਉਹਦੇ ਜਿਹੜਾ ਸਰਤੀ ਆਪਣੂ ਮਨ ਵੇਚਦਾ ਠੀਕ ਆ ਬੋਲ ਬੁਧੀ ਕਹਿਦੀ ਆ ਤੂੰ ਹਾਂਜੀ ਅੱਜ ਤੂੰ ਪਾਈਏ ਤੇ ਥੋਲ ਬੋਲਦੇ ਰਾਮ ਜੀਓ ਆ ਬੋਲ ਠੀਕ ਹੈ ਜੀ ਇਹਦੀ ਗੱਲ ਗੁਰਦੀ ਆਉਂਦੀ ਏ ਕਰ ਕਿਰਪਾ ਨਾਨਕ ਮੇਲ ਗੁਰ ਆਪਾਂ ਜਿਹੜਾ ਉਤਰ ਆਪ ਨੂੰ ਦੇ ਦੇ ਠੀਕ ਹੈ ਜੀ ਜੇਰਾ ਬੁੱਧੀ ਖੈਦੀ ਆ ਬੋਲ ਦੂ ਮਹੱਲਾ ਚੌਥਾ ਹ ਅਗਨੀ ਭਰਿਆ ਸ਼ਰੀਰ ਹੈ ਕਿਉ ਸੰਤੋ ਨਿਰਮਲ ਹੋਏ ਆ ਦੇਖ ਲੋ ਹ ਬਹਲਾ ਸ਼ਰੀਰ ਤਾਂ ਅਗਨ ਦਾ ਭਰਿਆ ਹੈ ਦੀ ਹਿਰਦਾ ਭਰਿਆ ਹੈ ਹਾਂਜੀ ਦੁਆਲੇ ਚਿੱਕੀ ਉਹ ਗੁਰ ਜੀ ਹਾਂ ਉਹ ਸ਼ਰੀਰ ਦੀ ਗੱਲ ਹੈ ਸ਼ਰੀਰ ਆ ਮੇਰੇ ਆਤਮ ਤਾਂ ਜਦੂ ਜਾਗ ਬਈ ਆਇਆ ਹੋਰ ਬਲੇ ਸਰੀਰ ਦੀ ਗੱਲ ਹੈ ਜਿਦੂ ਸੰਬੋਧਨ ਕਰੀਦਾ ਉਹ ਕੇਤਨ ਹੁੰਦਾ ਇਹ ਇੱਕ ਦਾ ਸਰੀਰ ਹੈ ਇਹ ਹਿਰਦਾ ਇਹ ਨਾਲ ਨਿਰਮਲ ਹੋਵੇ ਬੁੱਧ ਦੱਸੋ ਅੱਛਾ ਉਹਨਾਂ ਨੂੰ ਦੱਸ ਰਹੇ ਆ ਕਿ ਉਹਨਾਂ ਤੋਂ ਪੁੱਛ ਰਹੇ ਆ ਜੀ ਬਿਲਕੁਲ ਹਵਾਲੇ ਕਰ ਲੈ ਦੱਸੋ ਤਾਂ ਪੁੱਛੋ ਉਹਨਾਂ ਕੋਲ ਜਵਾਬ ਆਇ ਨਹੀਂ ਵਿਚਾਰੇ ਕੋਲ ਅੱਛਾ ਜੀ ਮੈਂ ਥੋੜੇ ਪੁੱਛ ਤੂੰ ਫੇਰ ਕਰਾਂ ਮੈਂ ਨਾਲ ਸਾਡੂੰ ਪਤਾ ਕਿਦੇ ਹੋਰ ਪੁੱਛ ਲੋ ਜਾ ਕੇ ਗੱਲਬਾਤ ਤਾਂ ਸ਼ੁਰੂ ਇੱਥੇ ਗੁਰਮੁਖੀ ਗੁਣ ਵੇ ਹਾਜ਼ੀ ਮਲ ਹਉਮੈ ਖੱਡੈ ਤੋਈ ਕੁਝ ਜਵਾਬ ਦੀ ਆਫਤ ਦਿੰਦੇ ਨੇ ਕਹਿੰਦੇ ਸਰਦਾ ਸਖਿਆ ਤੇ ਹੈ ਬਈ ਜਿਹੜੇ ਗੁਰਮਖਾਹ ਵਾਲੇ ਕੋਲ ਦੇ ਉਹ ਜੇ ਖਰੀਦੇ ਜਾਣ ਕਿਸੇ ਬਾਪੇ ਮਿਲ ਜਾਏ ਫਿਰ ਵੱਟੇ ਮਿਲ ਠੀਕ ਹੈ ਜੀ ਉਹ ਖਰੀਦ ਲੀਏ ਗੱਲ ਬਣ ਜੂਗੀ ਹਾਂ ਦੇ ਯਾਰੇ ਗੁਰੂ ਤੇ ਮਿਲਦੀ ਨਹੀਂ ਗੱਲ ਬਣਦੀ ਗੁਰੂ ਘਰ ਗੁਰੂ ਘਰ ਨਾਮ ਹੋਰ ਪ੍ਰਕਾਰ ਦੇ ਵੀ ਨਾਮ ਹੈਗੇ ਤੇ ਗੁਰੂ ਨਾਮ ਗੁਰੂ ਘਰ ਵਾਲੇ ਕੋਲ ਗੁਰੂ ਹੋਰ ਵੀ ਬਥੇਰੇ ਨੇ ਹਾਂਜੀ ਠੀਕ ਨਾਲ ਫਿਰ ਹਾਂ ਇਹਦੇ ਨਾਲ ਹਮੇ ਗੋਤਮ ਖਾਨ ਜਿਹੜਾ ਮਾਪੇ ਇਹਦੇ ਨਾਲ ਤੇ ਦਾ ਬਾਕੀ ਜਿੰਨਾ ਦੇਖੋ ਸਿਰਫ ਬੁਰਬਰ ਦਾ ਗਿਆਨ ਬਾਕੀ ਸਭ ਗਿਆਨ ਹੈ ਤੇ ਦੁਨੀਆ ਤੇ ਕੋਈ ਲੈ ਲੋ ਉਹਨਾਂ ਦੇ ਜਿੱਥੇ ਜਾ ਕੇ ਝੂਠ ਦੇ ਰੋਲ ਪ੍ਰੋਵਾਈਡ ਕੋਈ ਵੀ ਵੱਟ ਉੱਥੇ ਹੋ ਗਏ ਇਹ ਵਾਤੇ ਝੂਠ ਨੂੰ ਪ੍ਰੋਵਾਈਡ ਹੀ ਕਰਦੀ ਕਿਸੇ ਕੀਮਤ ਤੇ ਨਹੀਂ ਕਰਦੀ ਕਦੇ ਵੀ ਨਹੀਂ ਕਰਦੀ ਕਿ ਸਾਰੀ ਦੁਨੀਆ ਦੇ ਪਾਸੇ ਹੋ ਜਵੇ ਉਹ ਇਕੱਲਾ ਹੀ ਰਹਿ ਜੇ ਕੋਪਰੋਮਾਈਜ਼ੀ ਕਰਤਾ। ਇਹ ਕਰਕੇ ਇੱਥੇ ਹੂਬੇ ਨਹੀਂ ਰਹਿ ਸਕਦੀ। ਠੀਕ ਹੈ। ਹੂਬੇ ਨਹੀਂ ਆਦਾ ਕੋਪਰੋਮਾਈਜ਼ਰੀ ਹੈ। ਕੋਪੇ ਨਾਲ ਨਾਲ ਵਿਰੋਧ ਹੈ। ਦੋਨੋਂ ਕੋਈ ਸਹੀ ਬਠਾਈ। ਥਰੀ। ਸੱਚ ਵਣਾਂਜੇ ਰੰਗ ਸਿਓ ਸੱਚ ਸੌਦਾ ਹੋਈ। ਸੱਚ ਮਨਜਾ ਦੇਖੋ ਕਿਦਾਂ ਜੇ ਵਿੱਚ ਦੁੱਧ ਦੇ ਵਿੱਚ ਪਾਇਆ ਪਾਣੀ ਪਾ ਦੀਏ ਕੋਲਸੋ ਚ ਰੁਪਏ ਹੋਰ ਦੁੱਧ ਹੀ ਕਹਿ ਸਕਦੇ ਫਿਰ ਆਪਾਂ। ਉਹਨੇ ਪਹਿ ਗਿਆ ਨਾਲ ਉਹ ਚ ਹਾਂਜੀ ਹੱਥੇ ਲਾ ਦਿਨਾ ਸੱਚ ਦਾ ਉਹ ਲੱਗ ਰਿਹਾ ਜੀ ਨਾ ਸੱਚ ਪੂਰਾ ਸੱਚ ਜਦ ਵਿੱਚ ਝੂਠ ਨਾਲ ਜਾਂ ਫਿਰ ਸੱਚ ਰਹਿ ਗਈ ਖੋਟ ਹੋ ਗਈ ਖਰੀਦੀ ਏ ਸੱਚ ਸੌਦਾ ਹੋਇਆ ਫਿਰ ਸੱਚੇ ਸੌਦਾ ਹੁੰਦਾ ਸੱਚਾ ਸੌਦਾ ਹੋਣਾ ਜੇ ਸੱਚ ਖਰੀਦੀਏ ਕੋ ਸੌਦਾ ਸੱਚਾ ਸਾਡੇ ਕੋਲ ਕਿਥੋਂ ਹੋ ਗਿਆ ਠੀਕ ਹੈ ਫਿਰ ਉਹ ਜਿਹੜਾ वाला ਰੁਪਏ ਵਾਲਾ ਸੱਚਾ ਸੌਦਾ ਉਹਦੀ ਗੱਲ ਹੈ ਇਥੇ ਖੰਡਤ ਹੈ ਉਹ ਕਹਨੂੰ ਸੱਚਾ ਸੌਦਾ ਹੋਤਾ ਉਹ ਉਹਨਾਂ ਦਾ ਸੰਤਰੀ ਬਦਲਦੂ ਤਿਆਰ ਕਬੀਰ ਇਹ ਤਾਂ ਇਹਨਾਂ ਨੇ ਉਹ ਬਹੁਤਾ ਕੀਤੇ ਸੀ ਵੀ ਉਹ ਲਾਡ ਕੇ ਸੰਤਾਂ ਨੂੰ ਕਰਦਾ ਸੀ ਉਹ ਤਾਂ ਚੈਲੇਂਜ ਕੀਤਾ ਸੀ ਸੰਤ ਸਤਿ ਜੀ ਇਹ ਜੀ ਦੇ ਕੋਲ ਸੱਚ ਹੈ ਜੀ। ਤੁਹਾਨੂੰ ਦੱਸਦੀ ਗੱਲ ਸਹੀ ਹੋਈ ਹੈ। ਠੀਕ ਹੈ ਜੀ। ਇਹਦਾ ਬਾਅਦ ਇਹਦਾ ਬਾਅਦ ਦੇ ਜਿ ਇਤਿਜਾਦ ਨਾ ਸੰਤ ਸਾਧ ਗੁਰਦਵਾਰੇ ਦੇ ਇਤਿਜਾਦ ਗੁਰਬਾਣੀ ਤਾਂ ਫਿਰ ਇਹੀ ਕਹਿੰਦੀ ਹੈ ਸੱਚ ਬਣੰਜੈ ਰੰਗ ਸਿਓ ਸੱਚ ਸੌਦਾ ਹੋਈ। ਬਸ ਰੰਗ ਮਈਓ ਦਾ ਉਹੀ ਹੋਵੇ ਵਾ ਫੇਵਰ ਰੰਗ ਇਹ ਰੰਗ ਫਿੱਕਾ ਪੈ ਗਿਆ ਨਾ ਥੋੜਾ ਜਿਹਾ ਸੱਚ ਦਾ ਫੇਰ ਵੀ ਸੋਹਦਾ ਸੱਚਾ ਹਰ ਭਾਵੇਂ ਸੋਈ ਫਿਰ ਘਾਟਾ ਦਾ ਨਾ ਘਾਟਾ ਉਹ ਸੱਚ ਦਾ ਸਦਾ ਖਰਾ ਸਭ ਸੱਚ ਫਿਰ ਲਹਾਇ ਟੋਟਾ ਨਹੀਂ ਆ ਸਕਦਾ ਕਿਸੇ ਪੱਖੋਂ ਹੀ ਤਾਂ ਆ ਸਕਦਾ ਨਾਨਕ ਤਿੰਨ ਸੱਚ ਵਣਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਇ ਪਸੋਤੀ ਫੇਰ ਆਗੀ ਗੱਲ ਸੱਚ ਕਹਦੇ ਖਰੀਦਦਾ ਨਹੀਂ ਹਰੇ ਕੋਈ ਉਹ ਖਰੀਦਦਾ ਜਿਹੜਾ ਲਿਆ ਸੀ ਨਾਲ ਲਿਖ ਕੇ ਪੱਲੇ ਫੈਲਾਉਂਦਾ ਅਗਲੀ ਵਾਰ ਬਖਸ਼ਪਤ ਦੇ ਕੋਲ ਬਹੁਤ ਫੇਰਾ ਇੱਕ ਇਹ ਕਹਿ ਕੇ ਆਇਆ ਸੀ ਐਤਕੀ ਦੀ ਵਾਰੀ ਤਾ ਮਤਲਬ ਆ ਕਿਸੇ ਪਾਸੇ ਚਾ ਗੁਆਜ ਫਸਲ ਹੀ ਨਹੀਂ ਹੈ ਆ ਗਾਇਆ ਦਾ ਜਾਵੈ ਗੋਹ ਐਤਕੀ ਵਜਨ ਬਗ ਚੌਕ ਸੋ ਕੇ ਆਇਆ ਸੀ ਇੱਥੇ ਫੇਰ ਅੱਗੇ ਫਸ ਗਿਆ ਫਿਰ ਕੋਈ ਮਿਲ ਗਿਆ ਗੁਰਬਖ ਜਾਂ ਗੁਰਬਾਣੀ ਮਿਲ ਗਈ ਚੰਗੇ ਕਰਮ ਚੀ ਸਿਖਾਵੇ ਕਰ ਜਨ ਮਿਲ ਗਿਆ ਸਭ ਜੀ ਆ ਗਈ ਬੋਲਦੀ ਬਸ ਛੁੱਟ ਗਿਆ ਹਾਂਜੀ ਪੌੜੀ ਆ ਲਾਹੀਂ ਸੱਚਾ ਪੁਰਖ ਨਿਰਾਲੇ ਹਾਂ ਲਾਹੀਂ ਸੱਚ ਸਲਾਹ ਨੂੰ ਸੱਚ ਦੀ ਸਿਫਤ ਸਲਾਹ ਜਿਹੜੀ ਇਹ ਜੋਗ ਹੈ ਕਰਦੇ ਨੇ ਉਹ ਪੁਰਖ ਬਦਾਰੇ ਹੁੰਦੇ ਨੇ ਲੋਕ ਕਰਦੇ ਹਾਂ ਅੱਛਾ ਤੇ ਦੱਸ ਲਾ ਅੱਜ ਦੀ ਸਬਸਲਾ ਚੱਲਦੀ ਦਾ 250 ਦੇ ਬੈਠੇ ਦੇ ਦੇ ਬੈਠੇ ਦੇ ਰਾਜੇ ਉਹਨਾਂ ਦੇ ਕੁਝ ਨਾ ਕੁਝ ਖਲਾਫ ਗੱਲ ਕਹੀ ਜਾਂਦੀ ਹੈ ਗੁਰਬਾਣੀ ਚ ਆਇਆ ਹੋਇਆ ਕੋਈ ਟਿੱਪਣੀ ਆ ਜਾਂਦੀ ਸਮਝ ਲੋ ਠੀਕ ਹੈ ਬੋਲਾ ਬੋਲਾ ਬੋਲਾ ਬੋਲਾ ਹੀ ਹੋਣਾ ਹਾਂ ਆ ਜੀ ਲੋਕਾਂ ਦਾ ਕਾਰ ਦੇ ਉੱਤੇ ਵੀ ਜੇ ਕੋਈ ਚੀਜ਼ ਸਿਰ ਤੇ ਵੀ ਲੰਗਦੀ ਆ ਤਾਂ ਜਿਵੇਂ ਬਸਕੀਰ ਕੀਤਾ ਕਾਰ ਉਹਦਾ ਅੱਛੀ ਕਰਦਾ ਠੀਕ ਹੈ ਹਾਂ ਬੁਰਾ ਬਰਦਾਸ਼ਤ ਨਹੀਂ ਨੀ ਇਹ ਗੱਲ ਸੱਚ ਸੋਏ ਵੀ ਮਨ ਵਸੈ ਸੱਚ ਸੱਚਾ ਹਰ ਰੱਖਵਾਨ ਨੂੰ ਸੱਚ ਸੇ ਵੀ ਜੇ ਸੱਚ ਗੁੱਸੇ ਵੀ ਖਾਤੇ ਅਨੁਸਾਰ ਜੀ ਦੇ ਜੀਵਨ ਜੀਵਾ ਠੀਕ ਹੈ ਜੀ ਉਹਦੇ ਪੱਲੇ ਹੀ ਸੱਚ ਰੱਖਦਾ ਉਹਨੂੰ ਵੀ ਸੱਚ ਬਿੜੇ ਠੀਕ ਹੈ ਜੀ ਸੱਚੇ ਤੇ ਵੀ ਸੱਚ ਮਾਨ ਵਸਿਆ ਉਹਦੇ ਸੱਚ ਬੋਧ ਵਸਿਆ ਬੁੱਝੀ ਤੇ ਬੰਨੇ ਪਾਸੇ ਉਹਦੇ ਪੱਲੇ ਨੇ ਜੇ ਬਸੇ ਹੀ ਤੇ ਪੱਲੇ ਕਿਤੋਂ ਰਹਿ ਰਖਵਾਲੀ ਉਹ ਸੱਚ ਉਹਦੀ ਹਵਾਲੀ ਦੇ ਖਲਾਜ ਹੁੰਦਾ ਕਹਦਾ ਠੀਕ ਹਾਂਜੀ ਉਹ ਆਪਣੇ ਕਿਹਾ ਭੇਦ ਕਰ ਲੈਂਦਾ ਸ਼ਬਦ ਨੂੰ ਆਪਣੇ ਜੇ ਭੇਦੇ ਕਰ ਲਿਆ ਹੁਕਮ ਨੇ ਆ ਭੇਦ ਜੇ ਹੁਕਮ ਤੇ ਆਪੇ ਇਹਦ ਹੋ ਗਿਆ ਉਲਖਤਰਾਜੀ ਤੂੰ ਪੁੱਤਰ ਕੌਣ ਕੱਢ ਲਿਆਊਗਾ ਠੀਕ ਹਾਂਜੀ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਆ ਗਿਰ ਹਲ ਸੱਚ ਨਾਲ ਜ਼ਿਆਦਾ ਸੱਚਾ ਜੀ ਬੇਵਾਦੇ ਜੀ ਦੋਦੀ ਸੱਚਾ ਰਵੇ ਉਹ ਅੱਜ ਸ਼ਬਦ ਵਿੱਚ ਲਈ ਰੋਗੇ ਜਾ ਕੇ ਅੱਜ ਖਾਂ ਵੀ ਸੱਚਾ ਖਾਂ ਜਾ ਬਸੇ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੀ ਜਿਹਨਾਂ ਦੇ ਸੱਚਾ ਸੇਵਿਆ ਦੀ ਉਹ ਬਨੋ ਕਦੇ ਗੂਰ ਕਦੇ ਨੂੰ ਕਹਿ ਦੇਵੇ ਅਸੀਂ ਸੱਚ ਦੱਸਦੇ ਹਾਂ ਸੱਚ ਹੁੰਦਾ ਦੀਪਕ ਕਾਲੇ ਦੀ ਦੱਸਦੀ ਪੁਰਾਣੀ ਇਹ ਹੈ ਉਹ ਆਲ ਪਤਲ ਮੂੰਹ ਬੋਲਦੇ ਜਿਉਂ ਪੀਤਾ ਮਦ ਮਤਵਾਲੇ ਜਿਵੇਂ ਜਿਹੜਾ ਵੀ ਬੋਲਦਾ ਹੁੰਦਾ ਆਲ ਪਤਲ ਬੋਲੀ ਜਾਂਦੇ ਜਦ ਸਾਡੇ ਕਰਦੇ ਕਰਦੇ ਇਹਨਾਂ ਜੁੜਦੀ ਦੀ ਜੇ ਸਵਾਲ ਕੋਈ ਕਰਦੇ ਵਿਚਾਰੇ ਸ਼ੁਰੂ ਕਰ ਜਾਂਦੇ ਤੇ ਫੇਰ ਤੁਹਕੇ ਜਦੋਂ ਤੁਸੀਂ ਜਦ ਤੁਹਾਡੀ ਗੱਲ ਕਰ ਤੋਂ ਵਾਰਸੀ ਆਪਣੀ ਗੱਲ 'ਚ ਆਇਆ ਤਾਂ ਸਵਾਲ ਤੋਂ ਤੱਕ ਨਾ ਹੋਇਆ ਜਦੋਂ ਤੁਸ ਸਵਾਲ ਖਣਾ ਹੋ ਗਿਆ ਜਦੋਂ ਫਿਰ ਔਖਾ ਹੋ ਗਿਆ ਉਹ ਰੋਕਦੇ ਜੀ ਅਸੀਂ ਜਦੋਂ ਜੀ ਆ ਸਾਡੇ ਕੋਲ ਉਹ ਵੀ ਠੀਕ ਰਹਿਣੀਆ ਕੁਕੀ ਕਰਨ ਵਿਚਾਰੇ